ਪ੍ਰਭਾਵੇ ਮਨੁੱਖ ਗਤ ਪਾਵੇ ਪਰ ਪ੍ਰਭਾਵੇ ਮਾਨੁਖ ਗਤ ਪਾਵੇ ਮਾਨੁਖ ਗਤ ਪਾਵੇ ਮਾਨੁਖ ਗਤ ਪਾਵੇ ਜਬ ਜੇ ਪ੍ਰਭਾਵੇ ਦੇਖੋ ਇੱਕ ਮਨੁੱਖਾਕ ਪ੍ਰਭਾਵੇ ਪ੍ਰਾਵੋ ਦੇ ਅੰਦਰ ਲਾਹ ਮਾਨੁਖ ਸਰੀਰ ਗੁਰੁਖਾ ਸਰੀਰ ਚ ਜਿਹੜਾ ਪ੍ਰਭਾਵੇ ਉਹ ਵੀ ਬੁੱਧੀ ਦੇ ਨਜ਼ਦੀਕ ਸ਼ੀਲ ਹੋ ਸਕਦਾ ਹੈ ਤੇ ਦੀ ਭਾਈ ਕਰ ਸਕਦਾ ਹੈ। ਖਾ ਜੀਵ ਦੇ ਵਿੱਚ ਜਿਹੜਾ ਪਰ ਜੇ ਉਹ ਚਾਵੇ ਤਾਂ ਲੋਕ ਪਾਵੇ ਮਾ ਲੋਕ ਬਤ ਪਾਵੇ। ਲੋਕਾ ਜੀਵ ਨਹੀਂ ਗੱਤ ਬੋਲਣੇ। ਲੋਕਾ ਫਿਰ। ਨਹੀਂ। ਲੋਕਾ ਜੀਵ ਤੋਂ ਦੇਵਤਾ ਬਣ ਜਾਊ। ਉਹ ਦੇਵਤਾ ਬਣੂਗਾ। ਮਾਨਸ ਤੇ ਦੇਵਤਾ ਨਹੀਂ ਬਣੂਗਾ। ਸੱਚਾਈ ਤੇ ਹੀ ਬਣੂਗਾ। ਪਹਿਲਾਂ ਮਰਖਾ ਸ਼ਰੀਰ ਤੇ ਤਲਤੇ ਜੁੰਦਾ ਹੋ। ਜਾਂਦਾ ਇਧਰ ਆਣਾ ਆਸਮਾਨ ਦੇ ਫਲਤੇ ਜੁੰਦਾ ਜੀ ਦੇਵ। ਜਾਂ ਆਸਮਾਨ ਦੇ ਫਲਤੇ ਤਾਂ ਦੇਵਤਾ। ਜੇ ਤਾਂ ਮਨੁੱਖ। ਫਿਰ। ਉਸੇ ਵਸਤੂ। ਤੁਹਾਾਂਸ ਦੀ ਯਾਦ ਹਥਾ ਪਰ ਉਹ ਭਾਵੇਂ ਤਾਂ ਪੱਥਰ ਤਰਾਵੇ ਪਰ ਭਾਵੇਂ ਇਹ ਜੇ ਆਪ ਹੈ ਭਾਵੇਂ ਜਿਹੜਾ ਪ੍ਰਭ ਅੰਦਲਾ ਇਹਦੀ ਇੱਛਾ ਦੇ ਹੀ ਪਿਆ ਸਭ ਕੁਝ ਇਹ ਚਾਹੇ ਮਨ ਆਪੇ ਬੁਝੂਗਾ ਮੰਨੂਗਾ ਜੀ ਮੇਰਾ ਮਨ ਪੱਥਰ ਹੈ ਮਨ ਨੂੰ ਕੋਈ ਨਹੀਂ ਪੱਥਰ ਉਹ ਆਪੇ ਪੱਥਰ ਬਹਾਨਾ ਆਪੇ ਜੀ ਮੰਨਦਾਰ ਖਾ ਕਾਂ ਵਿੱਚ ਮੰਨ ਲਿਆ ਬਾਜ ਕਹਤਾ ਮਨੂ ਕੋਈ ਨਹੀਂ ਕੋਈ ਇਹ ਦੋ ਕਿੱਥੇ ਜੂਆ ਕੌਣ ਹੈ ਗਾਣ ਗਾਣ ਪ੍ਰਵੇਸ਼ ਦੂਸਰ ਕਹੀਂ ਨਾ ਕੋਈ ਦੂਜਾ ਕੋਈ ਹੈ ਹੀ ਘੜਿਆ ਹੋਇਆ ਫਰਜ਼ੀ ਹੈ ਉਹ ਫਰਜ਼ ਹੈ ਕਿਲਾ ਅਸੀਂ ਬੰਦ ਕਹਿੰਦਾ ਫਰਜ਼ ਕੀਤਾ ਹੋਇਆ ਪਾਪ ਸਾਧਰ ਵੀ ਫਰਜ਼ ਹੈ ਸਾਧਰ ਬੂਡ ਇਕੱਠੇ ਹੀ ਰਹਿੰਦੇ ਨੇ ਪਾਪ ਸਾਧ ਕਰਾ ਇਕੱਠੇ ਜਨ ਨੂੰ ਨਮਾਜ਼ ਚਾਪਾ ਪਾਪ ਸਾਧ ਰਹਿ ਮੰਨ ਕੇ ਰਹਿ ਜਾਣਾ ਜਿਹੜਾ ਜੂ ਉਹ ਤਾਂ ਦੇ ਹੁਕਮ ਦਾ ਨਾਮ ਆਣਾ ਜਿਹੜੇ ਰੱਬ ਦਾ ਤਾਂ ਪਾਣਾ ਰੱਬ ਦਾ ਪਾਣਾ ਜਿਹੜਾ ਉਹ ਜਿਹੜਾ ਹਕਮ ਹਾਲ ਦਾ ਜਿਹੜਾ ਪ੍ਰਭਾ ਹੈ ਪ੍ਰਭਾ ਮਨੁੱਖ ਦੇ ਵਿੱਚ ਪਰਗਤ ਹੈ ਇਹਦੇ ਹੀ ਉਹ ਖਾਇਦੀ ਪ੍ਰਭ ਹੈ ਇਹ ਮਨੁੱਖ ਦੇ ਹੀ ਪ੍ਰਭ ਹੈ ਉਹ ਬਨੁਖ ਦਾ ਪ੍ਰਭ ਹੈ ਜਿਹੜਾ ਮਨੁੱਖ ਦਾ ਪ੍ਰਭਾ ਜੋ ਪੂਰਨ ਪ੍ਰਭ ਨਹੀਂ ਹੈ ਉਹ ਪ੍ਰਭ ਉਸ ਨੂੰ ਨਿਰਮਲ ਕਰੇ ਉਹ ਬ੍ਰਹਮਾ ਛੋਟਾ ਪ੍ਰਭਾ ਉਹਦਾ ਜਿਹੜਾ ਹੁਕਮ ਹੈ ਉਹਦਾ ਨਾਮ ਆਣਾ ਨਹੀਂ ਖੁਦ ਇੱਛਾ ਦਾ ਨਾਮ ਆਉਂਦੀ ਇੱਛਾ ਦਾ ਉਹ ਉਹ ਪਾੜਨੇ ਦਾ ਉਹ ਮਾਨਾ ਹੈ ਮਨ ਆਪੇ ਹੈ ਉਹਦੀ ਜਿਹੜੀ ਇੱਛਾ ਹੈ ਉਹ ਪਾੜਨਾ ਉਹ ਹੁਕਮ ਦਾ ਬ੍ਰੋਲ ਕਰਦਾ ਉਹ ਉਹ ਕਹਿ ਉਹ ਵੰਗ ਉਹਦੀ ਭਾਵੇਂ ਦਾ ਨਾ ਹੋਵੇ ਹੁਕਮ ਦਾ ਵਿਰੋਧ ਉਹਦਾ ਪਾਣਾ ਕਰ। ਛਾ ਕਰਕੇ ਹੁਕਮ ਦਾ ਵਿਰੋਧ ਕਰ। ਉਹ ਜਿਹੜੀ ਜੋ ਖੜੀ ਜਿਨਾਗੇ ਸ਼੍ਰੀ ਲੈ ਸ਼੍ਰੀ ਮਾਇਆ ਹਾਂ ਪਰ ਉਹ ਭਾਵੇਂ ਬਿਨਸਾਸ ਤੇ ਰੱਖੇ ਪਰ ਉਹ ਭਾਵੇਂ ਤਾਂ ਹਰ ਗੁਣ ਭਖ ਹੈ ਜਿੱਤੇ ਤਾਂ ਕੇ ਮਾਨਸਾ ਸਰੀਰ ਹੈ ਕੋਈ ਅਸੀਂ ਸਾਦੇ ਬਿਨਾਂ ਨਹੀਂ ਰਹਿ ਸਕਦੇ ਜੱਤਾ ਸਾਨੂੰ ਸੋਝੀ ਹੈ ਸੰਸਾਰ ਦੀ ਉਦੋਂ ਪਹਿਲਾਂ ਤੋਂ ਵੀ ਸਾ ਲੈnde ਆਇਆ ਸ਼ਾਇਦ ਬਾਜਪਦਾ ਲੱਗਿਆ ਪਾਦੀਂ ਗੱਲਾਂ ਸਾਡੇ ਆਗਰ ਸਾਦੇ ਬਿਨਾਂ ਰਹਿ ਸਕਦਾ ਕੋਈ ਬੰਦਾ ਨਹੀਂ ਬਨਜਾਸ ਪਰ ਠੀਕ ਹੈ ਸਾਥੇ ਬਿਨਾਂ ਗਰਮ ਦੇ ਵਿੱਚ ਬਚੇ ਬਸਾਉਣਾ ਇਹ ਸਤੁਸ਼ਨਾ ਵਿੱਚ ਚੀਜ਼ਾਂ ਪ੍ਰਭਾਵੇ ਮੇਰੇ ਸਾਹ ਜੇ ਤਾਂ ਨਹੀਂ ਹੈਗੀ ਵਿੱਚ ਕੀ ਇਹ ਇਹ ਸਭਾ ਦੇ ਪ੍ਰਭਾਵੇ ਪ੍ਰਭਾਵੇ ਕਿੰਨਾ ਚਿਰ ਇਹਦੇ ਮੰਨੂ ਜਿਹੜਾ ਜੀਵ ਹੈ ਉਦੇ ਮੰਨੂ ਹੁਕਮ ਜਿਹੜਾ ਹੈ ਜੁੜਿਆ ਹੈ ਉਹਦੇ ਨਾਲ ਪਾਵੇ ਜਿਹਦੀ ਜੁਰੀ ਰਹੇ ਠੀਕ ਲੱਗਦਾ ਰਹੇ ਹੁਕਮ ਨਾਲ ਸ਼ਬਦ ਨਾਲ ਜੁੜਿਆ ਰਹੇ ਇਹ ਦੇਖੋ ਹੁਕਮ ਦੇ ਵਿੱਚ ਸਮਾਇਆ ਰਹਿਣਾ ਉਹਦੇ ਬਾਹਰ ਵੀ ਆ ਸਕਦਾ ਹੈ ਕਦੇ ਜੇ ਨੂੰ ਜਿੱਥੇ ਰੱਖਿਆ ਹੈ ਉੱਥੇ ਖੁਸ਼ਾ ਉਹਦੇ ਵਿੱਚ ਉਹਦਾ ਹੁਕਮ ਚੰਗਾ ਲੱਗਦਾ ਉਹਦਾ ਹੈ फिर ਵੀ ਸਾਦੇ ਨੂੰ हो ਕੰਮ ਹੀ ਕਰਦਾ ਸੀ ਤੇ ਪਰੇਸ਼ਾਨ ਨਾ ਹੋਵੇ ਉੱਥੇ ਰੱਖਿਆ ਹੋਇਆ ਜਿੱਥੇ ਇਹ ਨੂੰ ਰੱਖਿਆ ਹੋਇਆ ਉੱਥੇ ਪ੍ਰੇਸ਼ਾਤੀ ਮਹਿਸੂਸ ਨਹੀਂ ਜੇ ਕਰਦਾ ਨੂੰ ਸ਼ਾਇਦ ਪ੍ਰਾ ਇਹ ਨੂੰ ਨਹੀਂ ਪਾਉਂਦਾ ਤਾਂ ਪਰੇਸ਼ਾਨ ਹੋ ਜਾਂਦਾ ਜਿਹੜੀ ਜਿਹੜੀ ਬਾਬਦਨੀ ਚ ਹੈ ਜਾਂ ਅਸੀਂ ਉਥੇ ਧੀਰਣਾ ਕਰਦੇ ਸਭ ਪਰੇਸ਼ਾਨ ਹੋ ਜਾਂਦੇ ਇਹਦਾ ਮਤਲਬ ਉਹ ਸਾਨੂੰ ਭੁੱਲਦੀ ਨਹੀਂ ਹੈ ਉਹ ਭੇਜਦੀ ਜੇ ਦਰਮੇ ਦੇ ਵਿੱਚ ਇਹ ਪਹੁੰਦਾ ਸੀ ਇਹਨੂੰ ਉਥੇ ਹੁਕਮ ਤੱਕ ਕਰਦਾ ਸੀ ਸੋਟੀ ਜੁੜੀ ਹੋਈ ਸੀ ਲਿਵ ਲੱਗੀ ਹੋਈ ਸੀ ਲਿਵ ਲੱਗੀ ਦੀ ਸ਼ਬਦ ਨਾਲ ਪਹੁੰਦਾ ਸੀ ਸ਼ਬਦ ਕਾਂ ਲੱਗੀ ਹੋਈ ਸੀ ਤਾਂ ਬਿਨਾਂ ਸਾਥ ਦੇ ਆਪ ਉੱਥੇ ਜਿਉਂਦਾ ਰਿਹਾ ਬਿਨਾਂ ਸਾਹ ਤੇ ਰੱਖਿਆ ਇਹਨੂੰ ਯਕੀਨ ਤੋਂ ਆਇਆ ਕਿ ਉੱਥੇ ਬਿਨਾਂ ਸਾਹ ਤੇ ਕਿਉਂ ਰੱਖੇ ਕਿ ਮੇਰਾ ਇਹ ਤਾਂ ਸਾਨੂੰ ਪਤਾ ਨਹੀਂ ਸਾਹ ਤੇ ਬੱਚੇ ਹੁੰਦੇ ਨੇ ਪਰ ਕਿਹੜੀ ਸ਼ਕਤੀ ਹੈ ਕਿਉਂ ਹੁੰਦੀ ਬਾਹਰ ਕਿਉਂ ਨਹੀਂ ਹੋ ਸਕਦਾ ਉਹਨੇ ਇੱਥੇ ਬਲਦੀ ਹੁੰਦੀ ਜਿਹੜੀ ਉਹਨੇ ਤੇ ਰੱਖਿਆ ਸੀ ਉਹ ਇੱਥੇ ਰੱਖ ਕੇ ਉਹ ਨੂੰ ਸੁਪੋਧਨ ਨਹੀਂ ਹੁੰਦਾ ਹਾਂ ਇਹ ਨੂੰ ਸੁਪੋਧਨ ਨਹੀਂ ਹੁੰਦਾ ਇਹ ਨੂੰ ਸੁਪੋਧਨ ਨਹੀਂ ਹੁੰਦਾ ਜੇ ਪਰ ਭਾਵੇਂ ਬਨਸਾਸ ਤੇ ਨਹੀਂ ਕਿਸੇ ਨੂੰ ਸੁਪੋਧਨ ਹਾਂਜੀ ਸੁਪੋਧਨ ਨਹੀਂ ਆਇਆ ਕਿਸੇ ਨੂੰ ਕੋਈ ਇਹ ਭਗਤੀ ਦਾ ਨਹੀਂ ਸੰਬੋਧਨ ਕਿਸੇ ਉਪਦੇਸ਼ ਹੈ ਪਰ ਭਾਵੇਂ ਬਨਸਾਸ ਤੇ ਰੱਖੇ ਇਹ ਤਾਂ ਉਪਦੇਸ਼ ਹੈ ਸੰਗ੍ਰਮਸਾ ਤੇ ਦੇਖੋ ਆ ਦੇਖੋ ਬਿਨਾਂ ਸਾਥ ਦੇ ਵੀ ਪਰਮ ਜਿਹੜਾ ਹੈਗਾ ਜੇ ਥਣ ਉਹਦਾ ਭਾਣਾ ਭਾਵੇ ਬਰਾਬਰ ਤੁਹਾਨੂੰ ਮੂਹ ਪਾਵੇਗਾ ਨਹੀਂ ਜੀਵ ਨੂੰ ਆਪਣਾ ਭਾਵੇ ਜੀਵ ਨੂੰ ਭਾਵੇ ਆਇਦਾ ਗੱਲ ਰੱਖਿਆ ਜੀਵ ਦੀ ਗੱਦੀ ਉਹ ਜੀਵ ਨੂੰ ਜੀਵ ਨੂੰ ਰੱਖਦੇ ਨੇ ਪਰਮੰਦਰ ਨਾ ਹੀ ਨਾ ਆਹ ਉਹ ਬੇਚੈਨ ਨਾ ਹੋਵੇ ਕੀ ਉਹ ਸਭੀ ਜੇ ਬੇਚਾਨ ਹੋ ਗਏ ਤਾਂ ਬੱਚਾ ਮੰਗਦਾ ਹੈ। ਉਹਦੀ ਲੈਫਟ ਛੁੱਟ ਜਾਂਦੀ ਹੈ ਅਦਰ ਮੰਗਦਾ। ਉਹ ਤੇ ਲੈਫਟ ਬਾਹਰ ਛੁੱਟਣੇ ਚਾਂਸ ਨੇ ਛੇਕ। ਤਾਂ ਬੱਚੇ ਵਰਗਾ ਨੇ ਅਦਰ ਕੋਈ ਮਤਲਬ ਉਹ ਨੂੰ ਸੱਜ ਹੋ ਗਈ ਕੋਈ ਚੀਜ਼। ਧਿਆਨ ਉੱਟ ਗਿਆ। ਚਾਂਟ ਉੱਟ ਗਿਆ। ਉਹ ਸਭ ਦਾ ਡੀਲਾ ਕੰਪਟਾ। ਉਹ ਤਾਂ ਚੰਟ ਟੁੱਟ ਗਿਆ ਸਾ ਆਇਆ ਨਾ ਅਰਜੀ ਬੋਲੋ ਅਸਲ ਆ ਉਹ ਸਰੀਰ ਦੇ ਹੀ ਜਦੋਂ ਜਾਂਦਾ ਜਾਂਦਾ ਹੁੰਦਾ ਹੈ। ਕੁੱਟੇ ਦੇ ਵਿੱਚੋਂ ਜਾਦੋਂ ਲੱਗਣਾ ਹੈ ਇੱਥੋਂ ਧਿਆਨ ਟੁੱਟ ਗੋੜੀ ਉੱਥੇ ਲੈ ਜਾਣਾ ਧਿਆਨ ਜੇ ਸ਼ਰੀਰ ਨੂੰ ਕਿਤੇ ਵੀ ਕੋਈ ਆਉਣੀ ਹੈ ਦਿੱਕਤ ਸ਼ਰੀਰ ਵੱਜਣੀ ਕੋਈ ਚੀਜ਼ ਹੋ ਜੀਏ ਉੱਥੇ ਲੈ ਜਾਣਾ ਇੱਕਦਮ ਉੱਥੇ ਲੈ ਜਾਣਾ ਉੱਤੇ ਨੂੰ ਫਤਾਲਾ ਗੁਰੂ ਨੂੰ ਕਿੱਥੇ ਹੈ ਹਾਂਜੀ ਬਿਨਸਾਸ ਤੇ ਰੱਖੇ ਪ੍ਰਭਾਵੇ ਬਿਨਸਾਸ ਤੇ ਰੱਖੇ ਪ੍ਰਭਾਵੇ ਦਾ ਹਰਗੁਣ ਭਾਗ ਹੈ ਪ੍ਰਭਾਵੇ ਤਾਂ ਹਰਗੁਣ ਭਾਗ ਹੈ ਇਹ ਵੀ ਜੇ ਪ੍ਰਪੰਗ ਹੈ ਉਹਦਾ ਰਹੇ ਪ੍ਰਭੂ ਭਾਣੀ ਚੱਲਦਾ ਰਹੇ ਭਾਣੀ ਨੂੰ ਪਿੱਛਾ ਕਰਕੇ ਉੱਦਾ ਰਹੇ ਤਾਂ ਹਰਗੁਣ ਭਾਗ ਹੈ ਫੇਰ ਹਰਗੁਣ ਭਾਗਦਾ ਹੈ ਛੱਤ ਪਾ ਲਈ ਜੇ ਰੰਦੀ ਉਹ ਤੋਂ ਹੀ ਛੱਤ ਪਾਣੀ ਦੇ ਰਬੂ ਜਾ ਜਾ ਪਾਣੀ ਨੂੰ ਸੁੱਜ ਲੂਗਾ ਇਹ ਸਲੋਕ ਵਾਲਾ ਹੀ ਪ੍ਰਭ ਲੈ ਕੇ ਜਾਂਦਾ ਨਾ ਪਨ ਕਰਦਾ ਨਾ ਇਹ ਗਣੀ ਕਰਦਾ ਨਾ ਇਹ ਕਉਹੀ ਪ੍ਰਭ ਲਾ ਕੇ ਜਾਂਦਾ ਕਿ ਜਨਮ ਆਉਂਦਾ ਉਹ ਹੀ ਇਹਨੂੰ ਪਾਵੇ ਜੇ ਜੇ ਇਹਨੂੰ ਪਾਵੇ ਤਾਂ ਹਰ ਗੁਣ ਪਾਖੂਗਾ ਇਹ ਬਾਣੇ ਜਾਊਗਾ ਇਹਨੂੰ ਕੀ ਬਲੂਗਾ ਗਰਮ ਨੂੰ ਪਖਵਾ ਲਿਆ ਇਹ ਇਹ ਬਾਣੇ ਦੇ ਦੇ ਵਿੱਚ ਇਹਨੂੰ ਕੀ ਲਾਭ ਆ ਗਾ ਬਾਣਾ ਤਾਂ ਮਨੁ ਰਾਜੇ ਇਹਨੂੰ ਕੋਈ ਲਾਭ ਹੈ ਪ੍ਰਭੂ ਮੇਰੇ ਕੋ ਜੀਵਨ ਨੂੰ ਦੋ ਜੀਵ ਹੈ ਜੀਵ ਹੈ ਪ੍ਰਭੂ ਜੇ ਜੀ ਭੇਦੀ ਪ੍ਰਭੂ ਨਾਲ ਹੋਵੇ ਤੇ ਉਹ ਉਹਦੇ ਤੋਂ ਹੋਣੇ ਹੋ ਤਾਂ ਪ੍ਰਭੂ ਆਵੇ ਫੇ ਕਰੇ ਜਾਂਦਾ ਹੱਥ ਰੇ ਜਾਂਦਾ ਹੁਕਮ ਵਾਸਤੇ ਆ ਰਿਹਾ ਉਹ ਕੋਣ ਬ੍ਰਹਮਾ ਹੁਕਮ ਵਾਸਤੇ ਕਿੱਥੇ ਆ ਰਿਹਾ ਤੂੰ ਸਮਝਦਾ ਹੈ ਉਹ ਬ੍ਰਹਮਾ ਹੈ ਜੋ ਇਕਵਾਨੇ ਕਿਚਤਾ ਹੈ ਤੇ ਉਹ ਕੀ ਜਾਂ ਪਕਾਸਾ ਮਾਨਵ ਰਿਆ ਆਇਆ ये प्राण परिदे अवस्था से बाधित कर है वो गर्ज भी एक की चित्त है हां उधर भी एक माने की चित्त है उधर उधर क्यों एक की चित्त है उधर कभी तेरे कांप परते सबन ये ऐसे स्मृत होते उधर फसा है सफर का समझता बिना होते एक होते हो नहीं बन सकता है ना शरीर मिले ना भक्ति कर सके ना गर्ज सके ਉਸ ਤੇ ਤਾਂ ਜਮਦ ਬਹੁਤ ਥੋੜਾ ਪੀੜ ਤਾਂ ਰੱਖਿਆ ਉਹਦਾ ਪੀੜ ਵੀ ਥੋੜਾ ਰੱਖਿਆ ਬੜਾ ਔਖਾ ਸੀ ਜ਼ਿਆਦਾ ਦੇਰ ਨੂੰ ਇਹ ਪ੍ਰਪਾਵੇ ਦਾ ਮਤਲਬ ਹੈ ਇਹ ਉਪਰ ਪਾਵੁਲਾ ਰਹੇ ਬਾਹਰ ਆ ਕੇ ਵੀ ਬੋਲਦਾ ਫਿਰ ਥੋੜੀ ਬੋਲਦਾ ਬੜਾ ਔਖਾ ਜਿਹਾ ਪ੍ਰਪਾਉਣਾ ਹੈ ਉੱਥੇ ਜਿਹੜਾ ਅੱਜ ਪੋਜੀਸ਼ਨ ਹੈ ਉਹ ਪੋਜੀਸ਼ਨ ਉਹੀ ਬਣਦੀ ਹੈ ਜਿਹੜੀ ਗਰਬ ਵਿੱਚ ਸੀ ਉਦੋਂ ਬਾਅਦ ਬਖਤੀ ਸ਼ੁਰੂ ਹੋਣੀ ਹੈ ਜਿਹੜਾ ਕੰਮ ਕਰਨ ਆਇਆ ਜੇ ਉਹ ਹੈ ਦੀ ਉਹ ਪੋਜੀਸ਼ਨ ਨਹੀਂ ਸੀ ਉਦੋਂ ਹੀ ਬਖਤੀ ਲਾਜ਼ਮ ਨਾ ਕੋਈ ਫਿਰ ਉਹ ਪੂਰਾ ਮਰਦਾ ਆਰਾਮ ਨਾਲ ਸੁੱਧੇ ਚਲੇਗਾ ਸੁਣ ਵੀ ਲੈਂਦੇ ਇਹ ਗੱਲ ਕਾਇਨ ਸੁਣੀਏ ਯਾਰਾਂ ਦਾ ਸੁਨੇਹਾ ਉਪਦੇਸ਼ ਨਹੀਂ ਲੈਣਾ ਪਿਆ ਕੋ ਪਹਿਲਾਂ ਹੀ ਠੀਕੀ ਉਧਰ ਮਿਰਵੰਸੀ ਗੱਲ ਅਸਲੀ ਸੁਣ ਲਈ ਨਗਲੀ ਦਾ ਰੰਦੇ ਨਹੀਂ ਜੜਿਆ ਨਾ ਇਹ ਨਹੀਂ ਨਗਲੀ ਉਹਦਾ ਠੀਓ ਨਹੀਂ ਸੀ ਅਸਲੀ ਸੁਣਿਆ ਸਰਾਵ ਪਾਵੇ ਦੀ ਜਿਹੜੀ ਗੱਲ ਹੈ ਇਹ ਪ੍ਰਭਉ ਹੁੰਦਾ ਹੀ ਜ਼ਿਆਦਾ ਜਦ ਇਹ ਸਤਸੰਗ ਤੋਂ ਉਹਦੇ ਸਹਿਰੇ ਹੁੰਦਾ ਉਹ ਤਾਂ ਬਾਤ ਦੀ ਗੱਲ ਹੈ ਤਾਂ ਹਰ ਵਾਂ ਬਾਖੇ ਹੈ ਹਰ ਗੁਣ ਤਾਂ ਆਖਣ ਦੀ ਹੈ ਸਤਸੰਗ ਤੋਂ ਉਹਦੇ ਡਾਇਰੈਕਟ ਆਲਰੇਡੀ ਹੈਗਾ ਹੈ ਤੁਸੀਂ ਇਹਨਾਂ ਜਦ ਇਹ ਮੁਕਤੀ ਪ੍ਰਾਪਤ ਕਰ ਚੁੱਕਿਆ ਹੈ ਦੇ ਵਿੱਚ ਮੁਕਤੀ ਨਹੀਂ ਪ੍ਰਾਪਤ ਹੁੰਦੀ ਹੁੰਦੀ ਇਹ ਕਿ ਕਾਲਜੋ ਬਧੀ ਹੈ ਕਾਲਜੋ ਦੇ ਵਿੱਚ ਨਾਮ ਉਹ ਉਥੇ ਉਪਦੇਸ਼ ਨਹੀਂ ਹੈ ਉਥੇ ਜਿਹੜਾ ਨਾਮ ਹੈ ਉਥੇ ਜਿਹੜਾ ਇਹ ਸ਼ਬਦ ਉਹ ਉਪਦੇਸ਼ ਨਹੀਂ ਹੈ ਇਹਨੂੰ ਘਾਟਾ ਪੂਰਾ ਨਹੀਂ ਹੋ ਰਿਹਾ ਜਿਹੜਾ ਨਾਮ ਵਾਲਾ ਘਾਟਾ ਉਹ ਜੂ ਪੂਰਾ ਹੋ ਰਿਹਾ ਹੈ ਹਾਂ ਸਰੀਰ ਨਾਲ ਜੋੜਿਆ ਜਾਂਦਾ ਹੈ ਸਰੀਰ ਤੇ ਕੰਟਰੋਲ ਕਰਦੀ ਸਰੀਰ ਨੂੰ ਕਿਵੇਂ ਚਲਾਉਣਾ ਕਿਵੇਂ ਬਸਣਾ ਇਹ ਸਿੱਖਿਆ ਨਾਲ ਨਾਲ ਨਹੀਂ ਆ ਰਹੇ ਨਾ ਨਾ ਆਣਗੇ ਉਹ ਪੜ੍ਹਾਈ ਦਾ ਹੈ ਉਲਟ ਜਿਹੜਾ ਉਹ ਉਹ ਟੋਟਾ ਤਾਬਾ ਉਲਟ ਧਿਆਨ ਉਹਨੂੰ ਧਿਆਨ ਕਿਹਾ ਉਲਟਾ ਧਿਆਨ ਆਇਆ ਨਾਲ ਧਿਆਨ ਹੈ ਮਾਇਆ ਨਾਲ जोड ਰਿਹਾ ਉਹਦਾ ਉਲਟਾ ਧਿਆਨ ਲਗਾ ਮਾਇਆ ਨਾਲ जोडਿਆ ਸਮੂਹ ਜਿਹੜਾ ਗਾਹ ਤੋੜਨ ਜੋਗੇ ਵੀ ਛੜਾਉਣਾ ਨਹੀਂ ਅਸਲ ਲੋੜ ਹੈ ਉਹ ਜਿਹੜਾ ਹਿਰਦਾ ਹੈ ਹਿਰਦੇ ਦੇ ਵਿੱਚ ਨਹੀਂ ਕੁਝ ਪੈ ਸਕਦਾ ਪਰਮਦੇਅ ਅੱਗੇ ਪਰ ਉਹ ਕਦੇ ਵੀ ਨਹੀਂ ਭੂਜ ਜਾ ਸਕਦਾ ਅਜ ਸਰੀਰ ਦਾ ਲਾਹੂ ਤਾਂ ਉਹ ਭੂਜ ਜਾ ਸਕਦਾ ਉਹ ਹਿਰਦਾ ਜਦ ਮੂਦ ਕੇ ਮੈਂ ਜਾਉਂ ਕਿਥੇ ਧਿਆਨ ਪੈਣਾ ਹੁੰਦਾ ਹੈ ਉਹਦੇ ਕੋਲ ਗੱਲ ਤੇ ਮੈਂ ਪਹੁੰਚੂ ਆ ਜਿਹੜਾ ਕੰਨ ਨੇ ਆਏ ਤੇ ਆਵਾਜ਼ ਆਉਂਦੀ ਬਿਨus ਸਰਬਣੀ ਖੀਰ ਪਿਆ ਆ ਇਹ ਸਰਬਨ ਸ਼ਕਤੀ ਨਾਲ ਸੁਰਨਾ ਸ਼ਕਤੀ ਨਾਲ ਉੱਥੇ ਗਿਆਨ ਹੁੰਦਾ ਡੇੜੇ ਬਾਹਰ ਪਹੁੰਚਦਾ ਜੜਾ ਮੂਰੇ ਉੱਥੋਂ ਆਨੇ ਤੇ ਮੱਖਣ ਕੱਢ ਕੇ ਜਿਹੜਾ ਖੜਾ ਦਸ ਸਾਲ ਜਰ ਤੱਕ ਅੰਦਰ ਰਿਚਤ ਹਰਿਦੇਵ ਉਹ ਨਾ ਮੱਖਣ ਕੱਢ ਕੇ ਤਾਂ ਦਰ ਕਰਨ ਬਿਜਾਉਂ ਉਹਦੇ ਕੋਲ ਤਾਂ ਗੱਲ ਪਹੁੰਚ ਜਾਣੀ ਬੁੱਧੀ ਨਾਲ ਵਿਚਾਰ ਕੇ ਉਹਨਾਂ ਨੇ ਦੋਹਾਂ ਨੇ ਵਿਚਾਰ ਥੇ ਕਾ ਗੁਰਦੇਵ ਜੀ ਨੇ ਮੱਖਣ ਫਰਨਾ ਉਹ ਸ਼ਕਤੀ ਕਾ ਗੁਰਦੇਵ ਜੀ ਇਹ ਸੰਭੇ ਕੀਆ ਆਹ ਆ ਦੇ ਬਣਾ ਦੁੱਧ ਬਲਾਉਂਦਾ ਉਹ ਚਲੋ ਉਹਦਾ ਜਾਣ ਕੇ ਗਈਆਂ ਹਿਆਣਾ ਵੀ ਉਹ ਦੁੱਧ ਜਿਹੜਾ ਹੈਗਾ ਇਹ ਜਿਆ ਦੁੱਧ ਨਹੀਂ ਪੂਰਾ ਨਹੀਂ ਕੀ ਲੋ ਅਬੇ ਉਹ ਵੀ ਪਰਾ ਭਾਵੇਂ ਤਾਂ ਪਤਨ ਉਧਾਰਾ ਹੈ ਪਰਾ ਭਾਵੇਂ ਤਾਂ ਪਤਨ ਉਧਾਰਾ ਹੈ ਪਰਾ ਭਾਵੇਂ ਤਾਂ ਪਤਨ ਜਿਹੜੇ ਆਦਮੀ ਨੇ ਜਿਹਨਾਂ ਨੂੰ ਅਸੀਂ ਕਹਿੰਦੇ ਬੜੇ ਪਤਨ ਆਦਮੀ ਜੇ ਆਹ ਦੀ ਚੋਂ ਬਈ ਜਿਸ ਕੋਲ ਪੈਦਾ ਹੋ ਗਏ ਤਾਂ ਬੰਦੇ ਚੰਦੇ ਹੁੰਦੇ ਨੇ। ਉਸ ਤੋਂ ਵੀ ਹੁੰਦੇ ਨੇ। ਜੇ ਵਿਗੜ ਜੇ ਬੇਰੋ ਸਾਰੇ ਕੋਲ ਨੂੰ ਗਲ ਜਾਣ। ਉਹ ਬੱਦ। ਜੇ ਗੋਣੇ ਗਲ ਜਾਣ ਸਾਰੇ ਉਹ ਬੱਦ। ਆਜੀ। ਦਾ ਉਦਾਹਰਣ। ਉਹ ਬਦਲਦੀ ਉਦਾਹਰਣ ਹੈ। ਉਦਾਹਰਣ ਹੋ ਜਾ ਬੰਦੂ। ਆਪ ਕਰੇ ਆਪਨ ਵਿਚਾਰਾ। ਜੇ ਮਨ ਮੰਨ ਲਵੇ ਉਹਦਾ ਆਪਣਾ ਜੇ ਜੀਵ ਦਾ ਮਨ ਮੰਨ ਲਵੇ ਆਪਣੇ ਉਦਾਰ ਨੂੰ ਬਸ ਦੋ ਹਾਰ ਹੋ ਸਕਦਾ ਇਹ ਨਹੀਂ ਜਿਹੜੇ ਕਹਿੰਦੇ ਵੀ ਹੁਣ ਨਹੀਂ ਜਿਹੜੇ ਹਰੀ ਜਨ ਇਹ ਤਾਂ ਨਾਮ ਸੁਣਨ ਦੀ ਜਦ ਉੱਗੇ ਨਹੀਂ ਸਕਦੇ ਇਹਨੂੰ ਲੋੜ ਹੈ ਦੀ ਇਹ ਗੱਲ ਗੱਲ ਤਾਂ ਕੋਈ ਵੀ ਹੋਵੇ ਉਹ ਆਰ ਚੱਡਾਈ ਕੋਈ ਪਸਤ ਹੋਵੇ ਦੀਨ ਤੋਂ ਥੱਲੇ ਪਸਤ ਹੋਦੇ ਨੇ ਬਸ ਉਹ ਨਹੀਂ ਜਿਹਨੂੰ ਅਸੀਂ ਪ੍ਰਤੀਗਿਆ ਨਹੀਂ ਜਮੇ ਪਰਤ ਪ੍ਰਲਾਦ ਐ ਫਕਤਾਨੂ ਨੇ ਕਤਲ ਕੀਤਾ ਜਿਹੜੇ ਵਿਰੋਧ ਕਰਦੇ ਨੇ ਪਸੰਦ ਦੀ ਸਾਖਤ ਦਿੱਤ ਸੁ ਦੁਸ਼ਟ ਤੇ ਪਸੰਦ ਆਮ ਆਦਮੀ ਲੋਬ ਲਾਲਚ ਨਾਲ ਢੀਵਲੀ ਸੋਚਦਾ ਹੋਰ ਰੱਬ ਪਸੰਦ ਨਹੀਂ ਆ ਬਚਾਰਾ ਪਤਦਵੀ ਦਿਗਘੋ ਸੰਗੈ ਜੇ ਚਾਹੇ ਹੁਣ ਆਪ ਅਗਰ ਉਬੁੱਧੀ ਦਾ ਪ੍ਰਭਾਅ ਹਲ ਭੇ ਉਬੁੱਧੀ ਦਾ ਹਲ ਭਾਵੇਂ ਅਕਲ ਦਾ ਹਲ ਕਿਹ ਚਾਹੁੰਦਾ ਹੋਵੇ ਤਾਂ ਅਕਲ ਲੈ ਸਕਦੀ ਹੈ ਜੀ ਸਭ ਕੁਝ ਲੈ ਸਕਦੀ ਹੈ ਉਹ ਵੀ ਅੰਦਰੋਂ ਦਿੰਦਾ ਦੋ ਇਹ ਪ੍ਰਭਾਅ ਦੀ ਗੱਲ ਹੈ ਬੁੱਧੀ ਦੇ ਘਰ ਵਾਲਾ ਪ੍ਰਭਾਅ ਹੈ ਅੰਦਰਲਾ ਜੋ ਚੇਤਾ ਦਾ ਉਸਲਾ ਮਨ ਉਸਤਰਾ ਆਤਮਾ ਜਿਹੜੀ ਉਹ ਇਹ ਭਾਵੇਂ ਤਾਂ ਇਹ ਉਦਾਰੇ ਦਾ ਹੋ ਸਕਦਾ कि ओही ना चाहे हेदार के में यदि अंतरात्मा है तो प्रभु कोई प्रभु नहीं ऐ में बाहर ना फिर वो जो उन्होंने बाहर निकली जोड़ दा बंद ता अपने अंदर ही है तेरे लिए तेरी अंतरात्मा है प्रभु तू आप ही प्रभु है चलो थोड़ी बंदो जे प्रभु कोई और वे बैठा निकल गया है नहीं मैं ही मेरा प्रभु तो मेरे प्रभु ला ਫੇਰ ਉਹ ਭਾਵੇਂ ਉਹ ਨੂੰ ਫੇਰ ਬਣਾ ਲਾਂਗੇ ਵੀ ਤੂੰ ਭਾਵੇਂ ਬਣਾ ਦੇ ਗਰੀ ਜੇ ਸਵਾਲ ਇਹ ਗਿਆ ਜੇ ਪ੍ਰਭ ਦੇ ਅਰਥ ਹੋਰ ਗੱਲ ਨੇ ਤੇ ਸਵਾਲ ਇਹ ਕੀ ਕਹਣਾ ਪ੍ਰਭ ਨੂੰ ਕਿਹਦਾ ਕੌਣ ਹੈ ਪ੍ਰਭ ਉਹ ਲੱਭੋਂ ਪ੍ਰਭ ਹੈ ਤਾਂ ਮਾਨੇ ਜੋਗਾ ਛੱਡਿਆ ਨਹੀਂ ਹੋਰ ਹੋਰ ਕੋਣ ਜੋਗਾ ਕਿੱਥੇ ਭੱਜਣ ਜੋਗਾ ਨਹੀਂ ਇਹਨੂੰ ਆਪਣੇ ਨਾਲੇ ਬੰਦੇ ਇਰੂ ਇਹਦੇ ਨਾਲ ਹੀ ਬਣਿਆ ਜਿਹੜੀ ਉਹ ਜਰਾ ਉਹ ਹੈ ਨਾ ਉਹ ਜਰਾ ਸੰਦ ਕਹਿੰਦੇ ਦੋ ਕਰਦੇ ਤੇ ਇਕੱਠਾ ਕਰਕੇ ਵੰਡਦਾ ਹੋਣਾ ਕ੍ਰਿਸ਼ਨ ਕਹਿੰਦਾ ਦੋ ਨੇ ਇਕੱਠਾ ਕਰਕੇ ਉਹ ਰੱਖਿਆ ਹੋਇਆ ਹੈ ਉਹ ਕਹਾਣੀਆਂ ਆ ਬਣਾਈ ਹੋਈਆਂ ਨੇ ਹਾਂਜੀ ਪਰ ਭਾਵੇਂ ਉਧਾਰੇ ਆਪਰੇ ਪਰ ਭਾਵੇਂ ਦੇਖੋ ਕਾਣੀਆਂ ਵੀ ਬੜਨ ਜੁਣੀਆਂ ਉਹ ਜਿਹੜੀ ਉਹ ਰਿਸ਼ੀ ਦੀ ਹਾਲੇ ਹਾਲੇ ਆ ਪੱਥਰ ਦੀ ਬਣ ਗਈ ਸ਼ਰਾਪ ਦੇ ਦਿੱਤਾ ਪਤਦ ਸੀ ਨਾ ਪਤਦ ਮੰਨ ਲਈ ਜਦੋਂ ਸੀ ਨਾ ਅਸੀਂ ਸਭ ਜਿਵੇਂ ਲਿਖੀ ਹੋਈ ਹੈ ਉਹਨਾਂ ਨੇ ਪਤਦ ਮੰਨ ਕੇ ਸ਼ਰਾਪ ਦੇ ਦਿੱਤਾ ਜਿਸ ਨੇ ਪੱਥਰ ਦੀ ਬਣ ਗਈ ਉਹਦਾ ਲੋਦਾ ਵੀ ਹੋ ਗਿਆ ਚਲੋ ਆਰਾਮ ਦੇ ਪੈਰ ਨਾਲ ਉਹ ਜਿਵੇਂ ਕਹਿੰਦੇ ਨੇ ਉਹ ਜਿਹੜਾ ਗਾਇਨ ਚਾਇਓ ਉਹ ਮੈਂ ਹੋ ਗਿਆ ਉਹ ਤਾਂ ਸਗਦਰ ਹਾਂ ਉਹ ਤਾਂ ਸਗਦਰ ਇਹ ਤਾਂ ਹੀ ਗਿਆ ਸਰਦ ਹੋਣੀ ਚਾਹਤ ਉਹ ਹੀ ਗੁਰਬਾਨੀ ਗੁਰਬਾਨੀ ਦੇ ਜਿਹੜੇ ਤਰੀਕੇ ਨਾਲ ਦੱਸਿਆ ਗੁਰਬਾਨੀ ਉਹ ਤਰੀਕੇ ਨਾਲ ਕਰੂਗੀ ਜਿਹੜੇ ਤਰੀਕੇ ਨਾਲ ਗੁਰਬਾਨੀ ਦੱਸਦੀ ਆ ਅਸੀਂ ਉਹ ਤਰੀਕੇ ਨਾਲ ਸਾਬਤ ਕਰਦੇ ਹਾਂ ਹੋ ਜਾਂਦਾ ਉਹ ਆਪਣੇ ਤਰੀਕੇ ਨਾਲ ਸਾਬਤ ਕਰਦੇ ਜਿਹੜਾ ਉਹ ਕਹਿੰਦੇ ਨੇ ਤਰੀਕਾ ਵੀ ਐ ਹੋ ਗਿਆ ਹੁਣ ਕੋਈ ਆਰਾਮ ਲੈ ਆਉਣਿਆ ਆਰਾਮ ਦੀ ਮੂਰਤੀ ਲੈ ਆ ਉਹਦਾ ਨਾ ਢੋਕਰ ਮਰਾ ਕੇ ਉਠੀ ਕਰਾ ਦੇਣਾ ਬੜ ਜੀ ਅਜਿਹਾ ਦੱਸਣੇਗਾ ਮੈਂ ਹੁਤੀ ਹੈ ਉਹ ਤਾਂ ਬਾਤ ਹੀ ਗੱਲ ਹੈ ਹੂੰ ਤਾਂ ਚੁੱਪ ਨਾ ਜ਼ਮਾਨਾ ਕੀ ਹੈ ਸਾਹਸਦਾ ਸਾਬਤ ਕਰਨਾ ਅਸੀਂ ਮੰਨ ਲਾਦੇ ਗੱਲ ਇਸ ਨੂੰ ਸਬਰ ਤੇ ਦੀ ਸੁਦਾਈ ਰਹੀ ਸੋਦੇ ਸਬਰ ਤੇ ਸਾਸਤਰ ਕਾ ਤਾਂ ਉਧਰ ਜਾਂਦਾ ਉਧਾਰ ਹੋ ਜਾਂਦਾ ਹੈ ਪਰ ਜੇ ਉਹ ਚਾਹੁੰਦਾ ਹੋਵੇ ਅੰਦਰੋਂ ਬੈਂ ਹਜ਼ਾਰ ਕਰਨਾ ਆਪਣਾ ਦੁਆਹੀ ਕਰ ਸਕਦਾ ਕਿਸੇ ਦਾ ਕੌਮਦਾ ਮੈਂ ਆਪੇ ਦੀ ਮੇਰੇ ਕੋਲ ਨਹੀਂ ਦੂਰ ਬੇ ਆਪ ਕਰੇ ਆਪਨ ਵਿਚਾਰੇ ਇਹ ਵੀ ਆਪਣੀ ਇੱਛਾ ਦੇ ਖੜਾ ਹੈ ਸਭ ਕੁਝ ਹੈ ਨਹੀਂ ਆਪ ਕਰੇ ਆਪਨ ਵਿਚਾਰੇ ਆਪ ਕਰੇ ਆਪਨ ਵਿਚਾਰੇ ਜਦ ਆਪ ਕਰਦਾ ਹੈ ਕੀਤੇ ਵਿਚਾਰ ਵੀ ਆਪ ਕਰਦਾ ਵਿਚਾਰ ਕੇ ਕਰਦਾ ਕਰਾਂ ਗਲਾ ਕਰਾਂ ਜਦ ਆਪਣਾ ਹੀ ਕਰ ਲਗਿਆ ਵਿਚਾਰਦਾ ਹੈ ਕਰਾਂ ਤੇ ਦੂਏ ਦਾ ਕੀ ਨਾ ਕਸੂਰ ਤਾਂ ਕੋਈ ਤੇ ਕੀਤੀ ਆਪਣੀ ਵਰ ਜਿੰਨਾਂ ਕੀਤੀ ਜੇ ਕੀਤੀ ਤਾਂ ਆਪਣੀ ਵਰ ਜਿੰਨਾਂ ਕੀਤੀ ਕੀਤੀ ਤਾਂ ਵੀ ਆਪਣੇ ਵਰਤੀ ਨਾਲ ਕੀਤੀ ਜਾਂ ਧੀ ਕੀਤੀ ਤਾਂ ਵੀ ਆਪਣੇ ਕਿ ਆਪਣਾ ਵੀ ਆਪੇ ਵਿਚਾਰਦਾ ਹੈ ਕਰਨ ਤੋਂ ਪਹਿਰੇ ਵਿਚਾਰਦਾ ਤਾਂ ਕਰਕੇ ਵੀ ਵਿਚਾਰਦਾ ਗਲਤੀ ਕਰਕੇ ਵੀ ਵਿਚਾਰਦਾ ਹਾਂ ਜੁਹਾ ਸਿਰਿਆਂ ਦਾ ਆਪਸੋ ਆਮੇ ਖੇਲੇ ਵਿਖੇ ਅੰਤਰ ਜਾਮੇ ਦੋਹਾਂ ਸਿਰਿਆਂ ਦਾ ਜੋਪੀ ਹੈ ਚਾਹੇ ਨਰਗ ਨੂੰ ਜਾ ਜਾ ਜਾਹੇ ਸਰਗ ਨੂੰ ਜਾ ਜਾ ਤੇਰੀ ਮर्जी ਹੁਣੇ ਕਹਿੰਦੇ ਚਾਹੇ ਤਾਂ ਮਾਈ ਭਗਤੀ ਕਰ ਲੈ ਚਾਹੇ ਤਾਂ ਜਨਮ ਘੋਲਾ ਜੂਏ ਚਾਹੇ ਆਪਣਾ ਜਨ ਪਦਾਰਥ ਖੱਟ ਲੈ ਤੇਰੇ ਇਹੀ ਤੌਣ ਉਤਾਰੇ ਪਿੱਛੇ-ਪਿੱਛੇ ਨੂੰ ਹੋਰ ਪਾਸੇ ਜਾ ਰਿਹਾ ਪ੍ਰਭ ਇਹਨੂੰ ਪ੍ਰਭ ਹੋਣਾ ਰੋੜਾ ਤੇਰੇ ਮੁੜ ਕੇ ਤੂੰ ਪਿਆ ਜਾ ਤਸਦੋਗ ਤੱਕ ਦੀ ਗੱਲ ਆਈ ਹੋਈ ਐ ਤਸਦੋਗ ਤੋਂ ਬਾਅਦ ਫਿਰ ਇਸ ਨੂੰ ਪੜ੍ਹ ਕੇ ਚੱਲਣਾ ਪੂਆ ਪੰਨਾ ਉਹਨਾਂ ਲੋਕਾਂ ਦਾ ਪ੍ਰਭੂ ਹੋ ਗਿਆ ਹਾਂ ਦੋਪਰਾਥ ਲੈ ਗਿਆ ਮੁਤੀ ਲੈ ਗਿਆ ਉਹ ਮੁਤੀ ਲੈ ਗਿਆ ਵਸਰਾਮ ਨਹੀਂ ਹੈ ਉਹ ਯਾਰ ਪ੍ਰਤਾਪ ਦੇ ਵਿੱਚ ਮਿਲੇ ਪੂਰਨ ਬ੍ਰਹਮ ਤਾਂ ਹੈ ਪੂਰਨ ਬ੍ਰਹਮ ਤਾਂ ਫਿਰ ਵੀ ਪਰਮੇ ਪੂਰਨ ਬ੍ਰਹਮ ਹੋ ਦੋਹਾਂ ਸ੍ਰੀਆ ਦਾ ਆਪ ਸੁਆਮੀ ਖੇਲੇ ਵਿਖਸੇ ਅੰਦਰ ਦੋਹਾਂ ਸ੍ਰੀਆ ਆਪ ਸੁਆਮੀ ਖੇਲੇ ਵਿਖਸੇ ਅੰਦਰ ਜਾਂਦੇ ਖੇਲੇ ਖੇਲ ਦਾ ਵੀ ਆ ਖੁਸ਼ੀ ਹੁੰਦਾ ਖੇਲ ਤੇ ਵਿੱਚ ਹਾਂ ਉਹ ਚਾਈਕਲ ਦੇ ਗਲੇ ਜਿਹਾ ਮਾਇਆ ਜਿਹੜੂ ਉਹ ਫੇਲੂਰ ਫੇਲੂਰ ਅਜੀ ਤਮਨ ਸਾਹਿਬ ਦੇ ਕੋਈ ਹੱਥ ਦੇ ਦੂ ਫਿਰ ਸੇ ਅੰਦਰ ਜਾ ਕੇ ਪਰਮੇਸ਼ਰ ਤਾਂ ਫਿਰ ਜਦ ਵੀ ਤੂੰ ਘੇਰਦਾ ਉਹ ਤਾਂ ਸਿੱਧਾ ਉਹ ਤਾਂ ਖੋਜ ਰਹਿੰਦਾ ਉਹਨੂੰ ਫਰਕ ਨਾ ਨਾ ਅੰਦਰ ਜਾ ਦੀ ਵੀ ਉਹ ਤਾਂ ਖੁਸ਼ ਹੈ ਉਹਦਾ ਉਹਨੇ ਬਰਕਮੈਂਡ ਉਹ ਆਪਣਾ ਜੈ ਜਨੂ ਬੋਲੇ ਪਈ ਜੈ ਮਾ ਚਾਹ ਆਪਣਾ ਸਮਾਰਨ ਉਹ ਦੀ ਸਿਰਫ ਕੋਈ ਅਸਰ ਨਹੀਂ ਹੋਗਾ ਉਹ ਬੋਲੇ ਤਾਂ ਵੀ ਗੋਝਾ ਸਵਾਲ ਤਾਂ ਅੰਤਰ ਜਾਮੇ ਉਹ ਦਾ ਆ ਸਾਰਿਆਂ ਦੀ ਅੰਤਰ ਜਾਮੇ ਤਾਂ ਬੇਸਦਾ ਉਹਨੂੰ ਪਤਾ ਵੀ ਇਹ ਚਾਹੁੰਦਾ ਨਹੀਂ ਪਾਈ ਜਾਣਾ ਕੋਈ ਮੇਰੀ ਜਾਣਦਾ ਆਪਾਂ ਕੋਈ ਹੋਣਾ ਨਹੀਂ ਜਦ ਇਹ ਜਾਣਾ ਆਪਾਂ ਨੂੰ ਪ੍ਰੈਸ ਕਰਨਾ ਜੋ ਤੂੰ ਵੀ ਕਰਨਾ ਆਪਾਂ ਜਦੋਂ ਤਾਂ ਵੀ ਹੋ ਜਾਏ ਜੇ ਜ਼ਿਆਦਾ ਸਾਮੀ ਹੋ ਜਾਏ ਤਾਂ ਵੀ ਜਾਂਦਾ ਹੈ ਕਿ ਪੀਗਲ ਹੈ ਐਕਚੁਅਲੀ ਜਦੋਂ ਸਾਮੀ ਹੋ ਜਾਏ ਨਹੀਂ ਜਦੋਂ ਸਾਮੀ ਹੋ ਜਾਏ ਉਹਨੂੰ ਵੀ ਫਰਕ ਪੈਂਦਾ ਸੱਜਾ ਢਾਂਡਾ ਰੂਪੀ ਫਰਕ ਪੈਂਦਾ ਜੇ ਚਿੱਕਾ ਮਾਰੋ ਕੋਈ ਕਹਿਣਾ ਵੀ ਕਰਿਆ ਕਰੀਂ ਕਹਾਂ ਭਾਈ ਨਾਗਰੀਂ ਤੇ ਚਲਦੇ ਨਹੀਂ ਬਸ ਕਰਦੇ ਤੈਨੂੰ ਆਓ ਉਹ ਵਿਦਿਆਰਥੀ ਕਰਾ ਦਿੰਦੇ ਜੇ ਕਿੰਨਾ ਸੱਤ ਸੱਤ ਖਾਲੀ ਤੇਰੀ ਮਜ਼ਦੂਰੀ ਕਰਦਣੇ ਹਾਂਜੀ ਜੋ ਭਾਵੇਂ ਸੋ ਕਾਰ ਕਰਾਵਾ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਜੋ ਭਾਵੇਂ ਸੋ ਕਾਰ ਕਰਾਵਾ जो ਜਿਹੜਾ ਹੈ ਉਹ ਜੀਵ ਹੈ ਸਰੀਰ ਤੇ ਜਿਹੜੀ ਕਾਰ ਕਰਾਉਂਦਾ ਆਪਣੀ ਬੱਤੀ ਨੂੰ ਕਰਾਉਂਦਾ ਸਰੀਰ ਤੇ ਜੋ ਵੀ ਕਰਾਉਂਦਾ ਹੈ ਚਾਹੇ ਚਾਹੇ ਚੋਰੀ ਕਰਾ ਲਵੇ ਚਾਹੇ ਨਾ ਤੇ ਘਾਬਰਾ ਲਵੇ ਚਾਹੇ ਗੜਬੜਾ ਤੇ ਕਮਾਲ ਵੇ ਦੇ ਨਾਲ ਸੁਪ੍ਰਵੇ ਕਰੂਗਾ ਹਉਂ ਸਰੀਰ ਹੈ ਇਸ ਕਾਛੇ ਪਈ ਸਰੀਰ ਸੁਭੂ ਦਾ ਕੋਈ ਸਜਾ ਤੈ ਜੂੜ ਤੇਰੇ ਤੇ ਆਉਣੀ ਜੇ ਗੱਡੀ ਚਾਲ ਤੇ ਨਾ ਕਹਤੇ ਗੱਡੀ ਦੇ ਨਹੀਂ ਕਿਹੜਾ ਨਜ਼ਰ ਦਾ ਡਿਜਟ ਹੈ ਦੁਗਾ ਨਹੀਂ ਹੈ ਫੜੀ ਗਈ ਹੈ ਦਾ ਕੀ ਹੈ ਜੋ ਪਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰ ਨਾ ਆਵੇ ਕਹੇ ਸਾਧੂ ਆਉਂਦਾ ਹਿਨਾਂ ਦੀ ਥੋਰ ਕੌਣ ਹੈ ਸਰੀਰ ਤੋਂ ਕੰਪਨਾਂ ਨਾ ਹੋੜਾ ਜੋ ਸਰੀਰ ਦੇ ਵਿੱਚ ਹੈ ਜਿਵੇਂ ਜਮਾਂ ਕੇ ਕੈਬ ਤੇ ਸਮਸਾ ਇੱਕ ਜੋਤ ਜੋ ਬੜਾ ਨਗਾੜਾ ਨਗਾੜਵਾ ਜਾਂਦਾ ਇਹ ਸੁਖ ਜਿਹੜਾ ਹੈ ਇਹ ਸਾਰਾ ਇਹ ਸੁਖ ਸੁਖ ਬੁਢੀ ਹੈ ਜਿਆਦਾ ਭੋਖ ਦਾ ਤੇ ਹੈ ਕੋਈ ਨੂੰ ਪਾਵੇ ਗੱਲਿਆ ਉਹ ਜਾਨਵਰਾਂ ਤੇ ਵੀ ਬਿਲਕੁਲ ਤੁਸੀਂ ਲੈ ਕੇ ਜਾ ਸਕਦੇ ਉੱਥੇ ਜਿਆਦਾ ਆਇਆ ਸਾਡੇ ਕੋਲ ਪਰ ਤਾਂ ਕਿੰਨ੍ਹੇ ਮੁਕਦੀ ਗੱਲ ਮੁੱਖਾ ਜਨਮ ਤੇ ਇਹ ਹੁਂਗੀਆਂ ਸਪੀਸਾੜੀਏ ਉਹ ਵੀ ਨਾ ਉਹ ਚਾਹੇ ਚਾਹੇ ਅਜੀਬ ਕਹੀ ਕਿਉਂਕਿ ਆ ਜਾਂਦਾ ਵੀ ਸਾਰਿਆਂ ਨੂੰ ਓਹੀ ਜੋਤ ਆ ਪਰ ਇੱਥੇ ਕੇਵਲ ਰੁੱਖ ਦੀ ਗੱਲ ਕਿਉਂਕਿ ਗੱਲ ਚੱਲਦੀ ਆ ਧਰਮ ਤੇ ਬਜ਼ੁਰਗੀਆਂ ਲੋਗ ਬੁਢੀਆਂ ਇਹ ਆਦਮੀ ਮੰਨਦਾ ਬਾਕੀ ਤਾਂ ਜਨਮਾਂ ਦਾ ਛਰਮਾਣੇ ਕੋਈ ਗੱਲ ਹੈ ਨਹੀਂ ਤੂੰ ਆਪਣਾ ਅੱਗਾ ਸਵਾਲ ਨਹੀਂ ਸਮਾਰਦਾ ਪਰਮੇਸ਼ਰ ਦੀ ਸਹੇਤੇ ਕੋਈ ਅਸਰ ਬਣਦਾ ਨਹੀਂ ਪੈਂਦਾ ਪਰਮੇਸ਼ਰ ਦੀ ਸਹੇਤੇ ਕੋਈ ਅਸਰ ਨਹੀਂ ਕਹਿੰਦਾ ਮਤਲਬ ਇਹ ਉਹਨੂੰ ਕੋਈ ਗੁੱਸਾ ਨਹੀਂ ਉਹਨੇ ਕੋਈ ਸਜ਼ਾ ਨਹੀਂ ਦਿੱਤਦੀ ਉਹਦਾ ਖੁਦ ਹੈ ਉਹ ਸਜਾ ਖੈਦ ਤੋਗੀ ਕੋਈ ਸਜ਼ਾ ਮਿਲਦੀ ਹੋਵੇ ਇਹ ਗੱਲ ਵੇਰੀ ਹੈ ਘਾਟਾ ਵਾੜਾ ਚਲੇ ਜਾਣਾ ਕਹਿੰਦਾ ਅਖਰ ਦਾ ਖਾਤਾ ਜੂਰ ਕਰਨੀ ਜੇ ਕਪਤਵਦਾਰੀਆ ਹੋ ਕੇ ਚਲੇ ਗਿਆ ਉਹ ਵੀ ਹੀ ਸਜ਼ਾ ਹੋਊਗੀ ਅਹੀ ਸਜ਼ਾ ਹੋ ਰਹੀ ਹੈ ਇਹ ਵੀ ਸਜ਼ਾ ਨਹੀਂ ਹੈ ਜੋ ਮੈਂ ਕੀਤਾ ਆਕਾਡਾ ਪਾ ਲੈ ਉਹ ਕਾਡਾ ਪ੍ਰਾਪਤ ਹੋ ਕੇ ਮਨੂੰ ਧਫਾ ਕੱਢ ਲੰਦ ਮੋੜ ਗਿਆ ਪ੍ਰਾਪਤੀ ਕੀ ਹੈ ਐਂਡ ਵਿੱਚ ਸਾਜਾ ਹਿਸਾਬ ਦੀ ਹੁੰਦਾ ਪਰ ਵਪਾਰੀ ਹਿਸਾਬ ਕਰਦੇ ਨੇ ਸਾਜਾ ਦੇ ਵਿੱਚ ਉਹ ਜਿਵੇਂ ਸਹੀ ਪਾਇਆ ਵੇਦਾਂ ਨੂੰ ਪੂਰੇ ਜਨਮ ਦਾ ਠਾਠਾ ਵੱਧਾ ਹੋ ਜਾਂਦਾ ਆਪਾਂ ਸਾਡਾ ਸਾਥ ਵੀ ਚਲੀ ਜਾਂਦੇ ਚਾਹੇ ਰੋਜ਼ਾ ਰੋਜ਼ ਕਰੀ ਜਾਂਦੇ ਲੋਕ ਹਾਂਜੀ ਜੋ ਜੋ ਭਾਵੇਂ ਸੋ ਕਰਾਵੇ ਨਾਨਕ ਦ੍ਰਿਸ਼ਟੀ ਉਹਨਾਂ ਜੋ ਸਰੀਰ ਤੇ ਚਾਹੁੰਦਾ ਆਪਣੇ ਤੇ ਉਹ ਸਰੀਰ ਤੋਂ ਕੰਫਰਮ ਕਰਾਉਂਦਾ ਕਰਾਵੇ ਕਰਦਾ ਜੀ ਇਹ ਕਰਾਉਣੇ ਵਾਲਾ ਯਹ ਤਾਂ ਹੀ ਕਰਾਉਣ ਕਰਦੇ ਜੋ ਕਰਨ ਕਰਾਉਂ ਕਰਨ ਕਰਾਉਂ ਅੰਦਰੋਂ ਪੂਰਾ ਸਰੀਰ ਇਹ ਜਨਤਾ ਕੇ ਬਾਝਾ ਕੁਝ ਨਹੀਂ ਕਰ ਸਰੀਰ ਨੂੰ ਕੇ ਜਨਤੇ ਹੈ ਨਾ ਸਰੀਰ ਜਨਤੇ ਇਸ ਕਰਕੇ ਜਿਵੇਂ ਸਰੀਰ ਨੂੰ ਕਰਾਉਣ ਵਾਲੇ ਨੂੰ ਅਟਾਟ ਕਰ ਲਿਆ ਤਬੂ ਉਤੀ ਪੂਜੇ ਉਤਪਿਲੈਕ ਸਰੀਰ ਅਡ ਕਰਦਾ ਤੇ ਆਤਮਾ ਅਡ ਕਰਦੀ ਉਤਪਿਲੈਕ ਤਾਂ ਕਹੀ ਗੁਰੂ ਗੁਰੂ ਸਾਹਿਬ ਜੀ ਦੇ ਤਾਂ ਵੇ ਇਸ ਤਰੀਕੇ ਨਾਲ ਪਤਾ ਹੀ ਲੱਗਣਾ ਦਿੱਤਾ ਜੇ ਸਰੀਰ ਨੂੰ ਆਤਮਾ ਤੋਂ ਅਡ ਕਰਕੇ ਦਿਖਾਵੇ ਕਾਰਨ ਕਰਾਉਣ ਸਾਬਤ ਕਰਦਾ ਨਾਲੀ ਦ੍ਰਿਸ਼ਟੀ ਅਵਰਨਾ ਆਵਰ ਨਾਲਗਾ ਮਨ ਦਾ ਹੋਰ ਕੁਝ ਨਹੀਂ ਤਾਂ ਬੇਨਕੋਨ ਹੋਣਾ ਵੀ ਤਾਂ ਹੋ ਜੇ ਲੱਗਦਾ ਇਹ ਆ ਬਈ ਜੇ ਪੈਦਾ ਹੋਏ ਤੇ ਉਹ ਇਹ ਤੁਹਾਂ ਬਦਲ ਲੇਤਾ ਹੈ ਇਹ ਗੱਡੀ ਦਾ ਡਰਾਈਵਰ ਵੀ ਬਦਲਿਆ ਅੱਜ ਤੱਕ ਡਰਾਈਵਰ ਵੀ ਬਦਲੇ ਆਪਾਂ ਫਿਰ ਹੋਰ ਕਿੰਨੀ ਬਲਵਾਰੀ ਦਈਏ ਜੇ ਸਰੀਰ ਤੇ ਕੋਈ ਗਲਤੀ ਹੋਈ ਚੱਕਾ ਹੋਇਆ ਪੋਜ਼ਿਟਿਵ ਹੋਇਆ ਤਾਂ ਕਾਇਦੀ ਮਰਜ਼ੀ ਜਿਹੜਾ ਵਿਚ ਕਰੇ اقرار ہے شریف ਤੋਂ 네ਗੇਟਿਵ ਹੋਇਆ ਤਾਂ ਕਾਇਦੀ ਮਰਜ਼ੀ ਕਾਟਾ ਮਤੇਗਾ ਹਾਂ ਤੇਰੇ ਨਾਲ ਵੀ ਤਸਕੀਦ ਹੈ ਕਿ ਤੇ ਹਵਾਦਰ ਮੈਂ ਮਰਜ਼ੀ ਰਿਹਾ ਜੀ ਜੀ ਹੋਣਾ ਨਹੀਂ ਮਰਜ਼ੀ ਦੋ ਰਿਆ ਸਾਲਾਂ ਦਰਿਆ ਪਾਣੀ ਵੱਧ ਰਿਹਾ ਫਿਰ ਹਵਾ ਫਰੀਂ ਪੰਦੀ ਹੈ ਕੱਟ ਨੂੰ ਜੇ ਇੱਥੇ ਕਬਜਾ ਕੁੱਝ ਲੋਕਾਂ ਨੇ ਕੀਤਾ ਇਹਨਾਂ ਸਾਰਿਆਂ ਦੀ ਗਲਤੀ ਹੈ ਰਮੇਸਨ ਨੂੰ ਨਹੀਂ ਕਹਿੰਦਾ ਕਿ ਕਬਿਆ ਕਰੋ ਇਹ ਤਾਂ ਉਹਦੇ ਖਾਤੇ ਲੰਦਰ ਨੂੰ ਤਾਂ ਇਹਨਾਂ ਦਾ ਸੁਭਾਅ ਹੈ ਕਬ ਕਰਨੇ ਲੜਨਾ ਰਾਜੇ ਬਣਨਾ ਇਹ ਇਹ ਤਾਂ ਹੀ ਕਿਲੇ ਅੱਡ ਰੱਖਿਆ ਹੋਇਆ ਇਹ ਅੱਡ ਰੱਖਿਆ ਹੋਇਆ ਨਾ ਹਣਾ ਸਾਜ ਤੁਸੀਂ ਅਸੀਂ ਤਾਂ ਕੋਈ ਜ਼ਰਾਤ ਕਰਦੇ ਜੀ ਕਿਸੇ ਨੂੰ ਅਮਰੀਕਾ ਦਾ ਵੀ ਉਸ ਟਾਈਮ ਸੂਰ ਚੜਦਾ ਉਹ ਜਾਈ ਚੜਦਾ ਬੰਗਲਾ ਦੇ ਤੇ ਚੜਦਾ ਹੈ ਪਪਲਾ ਦੇ ਸਾਡੇ ਕਹਿ ਬਹੁਤ ਘਟੀਆਂ ਸਮਸੇਂਾਂ ਉਨਦੀ ਕਾਲਿਆਂ ਪਰ ਪਰਮੇਸ਼ਰ ਦੇ ਸੂਰਜੋ ਸੇਮ ਦਾ ਸੇਵ ਰੱਖਿਆ ਹੁਣ ਵਾਸਤੇ ਹਵਾ ਵੀ ਹੋਈ ਹੋਈ ਹੈ ਪਾਣੀ ਵੀ ਹੋਈ ਆਈ ਹੈ ਵੀ ਉੱਥੇ ਉੱਥੇ ਹੁੰਦੀ ਹੈ ਮੱਛੀਆਂ ਵੀ ਸੁੰਦਰ ਲੜੇ ਹੋਈਆਂ ਨੇ ਸਾਰੋ ਜੀ ਦੀ ਬੱਚੀ ਕੱਢ ਗਈ ਪਾਦੇ ਤੂੰ ਆਉਂਦੀ ਘਟੀਆਂ ਬੜੀਆਂ ਸਮਝਣ ਤੇ ਥੋੜੀ ਮਰਜ਼ੀ ਆਉਂਦੀ ਮੈਨੂੰ ਸਮਝਦਾ ਵੀ ਘਟੀਆਂ ਬੜੀਆਂ ਥੋੜੀ ਕੋਈ ਹੈ ਨਹੀਂ